ਪ੍ਰਭੂ ਕੈ ਸਿਮਰਨ ਰਿੱਤ ਸਿੱਧ ਨਾਮ ਨੇਦ ਪ੍ਰਭੂ ਕੈ ਸਿਮਰਨ ਰਿੱਤ ਸਿੱਧ ਨਾਮ ਨਾਮ ਅਗਰੀ ਜਾਨ ਪ੍ਰਭੂ ਕੈ ਸਿਮਰਨ ਗਿਆਨ ਪਿਆਰ ਤਾਂ ਖੁਦ ਹਾਂ ਰਿੱਤ ਸਿੱਧ ਨਾਮ ਨੇਦ ਕੀ ਹੁੰਦੀ ਹੈ ਜਿਹੜੀ ਰਿੱਤ ਹੈ ਅਦਿਤ ਹੁੰਦੀ ਹੈ ਜੋ ਭਾਇਵਰਤੀ ਹੈ ਸਿੱਧੀ ਦਾ ਮਤਲਬ ਸਮਝ ਸਿੱਧੀ ਦਾ ਮਤਲਬ ਹੁੰਦਾ ਜੋ ਮਾਇਆ ਦਾ ਗਿਆਨ ਹੈ ਮਾਇਆ ਦਾ ਤੱਤ ਹੈ ਤੱਤ ਮਾਇਆ ਜੀ ਵੀ ਸੱਚ ਹੈ ਨਾ ਮਾਇਆ ਦਾ ਬਚੂੜ ਲੜਣਾ ਸੱਚਾ ਸੱਚ ਲੈਣਾ ਸੂਰਜ ਹੈ ਸੂਰਜੀ ਲਾਈਟ ਸਾਰੇ ਰੱਬ ਹੁੰਦੇ ਨੇ ਹੈਗੇ ਨੇ ਸੱਚਾ ਵੀਰ ਜਲਾਜਾ ਜਾਂਦਾ ਸਾਰੀ ਨਿਕਲਦੀ ਸੱਚ ਇਹ ਇਹ ਤੱਤ ਲੈ ਆ ਮਾਇਆ ਦੇ ਵਿੱਚੋਂ ਕੀ ਤੱਤ ਗਿਆ ਸਾਡੀ ਗੱਲ ਉਹਦੇ ਮਸਲਾ ਦਿੱਤੀ ਹੁੰਦੀ ਇਹਨੂੰ ਕਹਿੰਦੇ ਰਦਸਤ ਮਾਇਆ ਦੀ ਸਹੀ ਜਾਣਕਾਰੀ ਮਾਇਆ ਦੀ ਸਹੀ ਸੋਚ ਜਿੱਦੀ ਸਾਡੇ ਕੰਬਦੀ ਹੈ ਜਿਹਦੇ ਬਾਅਦ ਅਸੀਂ ਸੱਚ ਸਮਝੋਲ ਆਪਣੇ ਬਸਰ ਖਤਰ ਅਸੀਂ ਗਾਹ ਮੇਰਾ ਕਹੇ ਸਾਹ ਸਮਝੋ ਸੱਚ ਦੇ ਉੱਤੇ ਹੀ ਦਵਾ ਸੱਚ ਸੁਖਿਆ ਰਹੇ ਪਹਿਨਾ ਕਾਲਵਜਾ ਪੈਦਾ ਛੱਲੇ ਉਹ ਛੱਤ ਹੁੰਦੀ ਹੈ ਕਿ ਸੰਤ ਉਹ ਜੀ ਕਾਲੋ ਥਲੇ ਜੋ ਕਰਦੇ ਨੇ ਅਸਲ ਹੈ ਫੋਨਾ ਤਾਂ ਤੇ ਹੋੜ ਸ਼ਾਤ ਦਾ ਲੋਰੀ ਉਸ ਟੈਂਪਰੇਰੀ ਛੱਤ ਹੈ ਕਾਲੋ कालम ते बेड़ो ते दू शक नहीं बैठी एतां माया दा ज्ञान ता कालबा चले सर माया ते ज्ञान ते कालबा विच कालम ते बना गल्ली बनदी ए क्योंकि स्पोर्ट है स्पोर्ट ते काल कौन चीज माया दा ज्ञान ती स्पोर्ट ते बुनो पर ज्ञान ते नी सकदो समझ नी आ सकदा तो खा परे नी कीजे नु के अंत प्राप्त ਜੈ ਕੀ ਜਨਨਾ ਤੁਹਾਂ ਦਾ ਜੈ ਕੀ ਜਨਨਾ ਅਦ੍ਰਿਸ਼્ય ਕੀ ਨੂੰ ਦ੍ਰਿਸ਼ਟਮਾਨ ਦੇ ਵਿੱਚੋਂ ਸਮਝੋ ਦ੍ਰਿਸ਼ਟਮਾਨ ਦੀ ਮਦਦ ਨਾਲ ਜੋ ਕੁਝ ਦ੍ਰਿਸ਼ਟਮਾਨ ਹੈ ਸਾਡੇ ਕੋਲ ਇਹਦੇ ਵਿੱਚੋਂ ਹੀ ਮਸਾਲਾ ਦੇ ਦੇ ਕੇ ਉਹ ਜਿਹੜਾ ਅਦ੍ਰਿਸ਼ ਹੈ ਉਹਦਾ ਨਕਸ਼ਾ ਤੁਹਾਡੇ ਅੰਦਰ ਬਣੂਗਾ ਤਾਂ ਉਹਦੇ ਨਾਲ ਤੇ ਦਿਸਣ ਦੀ ਲੋੜ ਹੈ ਮਾਇਆ ਦੇ ਗੰਦੀ ਲੋੜ ਹੋਊ ਕਿ ਨਹੀਂ ਹੋਊ ਉਹ ਕੁੰਜਾਂ ਹੈ ਕਜੂਏ ਦੀ ਹੈ ਸਰਵਤ ਇੱਕ ਇੱਕ ਨਾਮ ਨੇ ਦੋਜੀ ਜੇ ਨਾ ਨਦਾ ਅਮਰ ਤੇ ਪ੍ਰਭ ਕਾ ਨਾਮ ਆਇਆ ਨਾ ਨਦਾ ਹੋਤੀ ਜੇ ਤੇ ਰਹਿਤ ਸਿਰਫ ਮਾਇਆ ਦਾ ਗਿਆਨ ਮਾਇਆ ਦਾ ਸੱਚ ਰੋਜ਼ ਸੋਚਦਾ ਹੋ ਕਿ ਕਿ ਸਾਡੇ ਕੋਲ ਸਿੱਧੀ ਨਮਨ ਨੂੰ ਸੋਚੀ ਹੁੰਦਾ ਕੋਤ ਬਦਲੀ ਸਿੱਧੀ ਤੋਂ ਪਾਈ ਜਾਂ ਕੋਤ ਬਦਲ ਜੂ ਵੀ ਸੋਚੀ ਆ ਜੂ ਵੀ ਰੇਕ ਸਿੱਧੀ ਰੇਕੀ ਸੋਚੀ ਹੋਣੀ ਫਰਕਿਆਨ ਜਾਨਾ ਤੁਮ ਇਹਦਾ ਮੰਨਣਾ ਰੂਲ ਪਾਇਆ ਫਰਕਿਆਨਾ ਫਰਕਿਆਨ ਨਾਮ ਨੇ ਨਾਮ ਹੈ ਕੋਨਾ ਮਾਫ ਜਾਨਾ ਸੰਸਾਰ ਚ ਨਹੀਂ ਹੈ ਸੰਸਾਰ ਦਾ ਗਿਆਨ ਨਹੀਂ ਹੁੰਦਾ ਸੰਸਾਰ ਦਾ ਗਿਆਨ ਲੁਕਤ ਹੋ ਜਾਂਦਾ ਹੈ ਇਹ ਜਦੋਂ ਕਿਸੇ ਨੂੰ ਸਮਝ ਆਉਂਦੀ ਹੈ ਨਵੇਂ ਇਹ ਨਵੇਂ ਗਿਆਨ ਹੁੰਦਾ ਨਵੇਂ ਖਜਾਨਾ ਹੁੰਦਾ ਗਿਆਨ ਦਾ ਇਹ ਨਵਨਿਦਤਾ ਹੈ ਨਵਨਿਦ ਅੰਮ੍ਰਿਤ ਰੋਪਾ ਨੋ ਦੇ ਮੈਂ ਇਸ ਦਾ ਵਿਸਵਾਮ ਵਾਲੀ ਦੇ ਹੀ ਕੋਲ ਤੇ ਗੋਪਤ ਦੇਹੀ ਵਿੱਚ ਬੰਦ ਤੇ ਅੰਦਰ ਇਹਦਾ ਵਿਸਰਾਣ ਹੁੰਦਾ ਉਹਦੇ ਅੰਦਰ ਉਹਦੀ ਗਲਤ ਕੀ ਬੰਦੀ ਮਨ ਵਿੱਚ ਆਪ ਅਰੇ ਜੜਾ ਜਿਹੜਾ ਮਨ ਵਿੱਚ ਆਪ ਹੈ ਉਹ ਬੋਲਦਾ ਫਿਰੇ ਆਪੇ ਬੋਲਦਾ ਤੁਫਰੀ ਤਾਂ ਕਹੇ ਤੁਫਰੀ ਉਸਤ ਤੁਤੇ ਹੋਏ ਉਹ ਤਾਂ ਕਹਿੰਦੀ ਆ ਵੀ ਮੈਂ ਨਹੀਂ ਮੈਂ ਨਹੀਂ ਉਸਦੀ ਕਰ ਰਹੀ ਉਹ ਨੂੰ ਰਿਹਾ ਕਿ ਤੁਮਰੀ ਉਸਤ ਤੁਮਤੇ ਹੋਏ ਨਾਨਕਵਲ ਨ ਜਾਣ ਸਕੋਏ ਤੂੰ ਆਪਣੇ ਉਸਤ ਆਪੇ ਕਰਾ ਰਹੇ ਹੋ ਉਹ ਬੁਲਵਾ ਰਿਹਾ ਹੈ ਉਹ ਬੁਧ ਬੋਲ ਰਹੀ ਹੈ ਆਪਣੇ ਜਾਣ ਆਪੇ ਦੇ ਰਿਹਾ ਆਪਣੇ ਵਿੜਾਈ ਆਪੇ ਹੀ ਦੱਸ ਰਿਹਾ ਤੇਰੀ ਉਸਤ ਕੁੰਤ ਜਾਨ ਕੋਲ ਨਾ ਕਿ ਹਣਸ ਕੋਈ ਉਹ ਜਾਨਦੋ ਜਿਹਨਾਂ ਦੇਖਿਆ ਹੋਵੇ ਤੇ ਦੇਖਿਆ ਕਿ ਸੱਜਣ ਦੀ जानदाई कोई दी तो देखो जानकारी कुछ चीज हो अपनी जानकारी आप ही न कर काद तुम तक ये है जब तो आप एक हो जनता एक रहया था एको करना ओनो एक जानकारी कद हुंदी है जब आप एक हो जनता एक रहया ਦਾ ਦਾਪੀ ਕੋਰੇ ਗਿਆ ਮੈਂ ਇੱਕ ਹੋ ਰਿਹਾ ਦੋ ਦੋ ਨਹੀਂ ਹੁੰਦਾ ਕਹਦਾ ਆਪ ਦੋ ਕੋ ਜਾਨਾ ਲਗਾਤਾਰ ਕੇ ਪਹੁੰਚੀ ਉਤਨੀ ਇੱਕ ਰਹਿਆ ਤਾਂ ਇੱਕੋ ਜਾਨਾ ਫਿਰ ਕਦ ਦੱਸਦੇ ਫਿਰ ਇੱਕ ਨਹੀਂ ਬਿਆਖਿਆ ਨੂੰ ਕਰਦਾ ਉੱਤੇ ਉਹ ਘਰ ਸੱਤ ਰੂਪਾਂ ਤੋਂ ਵਰਤੋ ਵਰਤੋ ਪੋਦੇ ਦਾ ਪਾਲੂ ਚੋ ਜੀ ਸਤਿ ਕਿਵੇਂ ਕੀਤੀ ਇਹ ਵਿਆਖਿਆ ਇਤਨੀ ਗੌੜੀ ਲਾਲ ਕੇਹੀ ਵਸੀ ਜੀ ਉਹਦੇ ਗੌੜੀ ਲਾਲ ਦੇ ਵਿੱਚ ਉਹਦੇ ਵਿੱਚ ਇਹੀ ਬੋਲਨ ਇਹੀ ਵਸੀ ਹੈ ਬੱਜੂ ਪਾਸ਼ਾ ਜੀ ਵੀ ਜਿਆਦਾ ਤੁਮ ਨਹੀਂ ਉਸੇ ਤੇ ਹੋਏ ਤਾਂ ਕਹਤਾ ਉਹ ਤੁਮ ਕੌਣ ਫਿਰ ਤੋਈ ਮੁੜ ਕੇ ਤੂੰ ਪਿਆ ਉਹ ਜਿਹੜਾ ਤੂੰ ਉਹ ਤੂੰ ਹੀ ਤੋਪੇ ਮੈਂ ਬਹਿਣ ਉਹ ਰਿਹਾ ਜਦ ਤੂੰ ਤੋੜਨਾ ਰਿਹਾ ਹੋਂਵਰ ਮੈਂ ਜਦ ਮੁੜ ਗਈ ਫਿਰ ਇੱਕ ਹੋ ਗਿਆ ਆਪੇ ਇੱਕ ਹੋ ਗਿਆ ਹੋਂਵਰ ਬਹਿ ਦੋਏ ਮਿਟ ਕੇ ਉਹ ਉਹ ਬਹਿ ਬਹਿ ਜੋ ਹੋਵੇ ਫਿਰਕ ਹੋ ਗਿਆ ਫਿਰ ਇਹਨੂੰ ਪਤਾ ਇੱਕ ਹੁੰਦੇ ਹੁੰਦੇ ਇਹਨੂੰ ਇੱਕ ਰਾਗਿਆਨ ਹੋ ਗਿਆ ਇੱਕ ਕਿਵੇਂ ਹੋਣਾ ਇਹ ਹੀ ਦੱਸਣਾ ਹੈ ਦੱਸਣਾ ਕੀ ਹੈ ਇਸਦਾ ਗਿਆਨ ਕੀ ਹੁਣ ਕੀ ਹੈ ਹਮੇਂ ਨਾ ਕਿਵੇਂ ਹੋ ਜਾਂਦੀ ਹੈ ਕਿਵੇਂ ਆਪਣੀ ਹੱਡ ਵੀਤੀ ਉਹ ਦੱਸਣੀ ਹੈ ਆਪ ਨੂੰ ਰਾਮ ਆਇਆ ਕੋਈ ਬਿਮਾਰੀ ਸੀ ਵੇ ਮੇਨੂੰ ਦਾ ਭਾਈ ਆਇਆ ਰਾਮ ਆਇਆ ਅੱਲਾਹ ਦਾ आत्म कथा किया साधन तसी आत्म क्या ना आत्म कथा हरकी कथा या आत्म कथा ने तो सब को भक्ति हर ने अपनी कथा आपे दसी है ते आत्म कथा कह लो या हरकी कथा कह लो आत्म कथा में जो आत्म ज्ञान मिलेगो ते आत्म ज्ञान आत्म ज्ञान जात में होगा यही आत्म वाले सब कुछ लेया होया ਆਤਮ ਗਿਆਨ ਆਤਮ ਰਾਜ ਚੰਨ ਜੀ ਜਾਣ ਤਬ ਨਾਲ ਨੇ ਬਸ ਚੌਥਾ ਪਰ ਸੱਚ ਖੰਡ ਵਾਲਿਆ ਹਰ ਜਸ ਜਸ ਹੁੰਦਾ ਜਸ ਜਸ ਹੁਕਮ ਦਾ ਪਾਵਰੋਂ ਦੇ ਕੋਲ ਪਾਵਰੋਂ ਦੇ ਕੋਲ ਜਸ ਹੁੰਦਾ ਜਸ ਨਹੀਂ ਆਉਂਦਾ ਜੀਤੈ ਨਹੀਂ ਹਰ ਜਸ ਜਾਜ ਹੋਗ ਬੰਦ ਕੋਮੰਡਰ ਸਭ ਕੋ ਹੈ ਪ੍ਰਭ ਕਰਿ ਸੇਵਨ ਗਿਆਨ ਧਿਆਨ ਤਤ ਬੁੱਧ ਹਾਂ ਤਾਂ ਇਸ ਕਰਕੇ ਪ੍ਰਪਦੇ ਸਫਲ ਗਿਆਨ ਧਿਆਨ ਤੇ ਤਤ ਬੁੱਧ ਆ ਜਾਂਦੀ ਤਾਂ ਹੈ ਜਿਹੜਾ ਉਹ ਨਾਮ ਲੈਂਦਾ ਉਹੀ ਤਤ ਬੁੱਧ ਜਿਹੜਾ ਨਾਮ ਹੈ ਨਾ ਉਹ ਹੀ ਬੁੱਧ ਉਹ ਤਤ ਬੁੱਧ ਕੀ ਹੈ ਤਤ ਬੁੱਧ ਉਹ ਆਏ ਜਦੋਂ ਧੂਮੀ ਆਈ ਹੈ सोई सोई जा घी है जड़ी ए सुती पड़ी सी ए बुंद ए सांवरी सी ओथे कथा सुती थी ओ पार्वती सांवरी री कथा सुनते नी कथा ए कथा सी कथा ए मत जद गौरव श्री जीव ओदो कथा सुना रहया ਆਜਾ ਸਰੀਰ ਚ ਬਣਨੀ ਤਾਂ ਕਹਾਤਾ ਸੁਣ ਲਈਏ ਨੇ ਅੱਧੀ ਨਿਕਲ ਆਇਆ ਦੇ ਵਿੱਚ ਮੈਂ ਸੌਣ ਦੀ ਕਹਾਤਾ ਸੁਣ ਲਈ ਨਿਕਲਦੀ ਸੁਣ ਚੱਕਰ ਹੈ ਜੀ ਬਹੁਤ ਦੀ ਵਾਲੀ ਗੱਲ ਇਹਦੇ ਨਾਲ ਜੋੜੀ ਹੋਈ ਹੈ ਨਿਕਲ ਵਾਲੀ ਹੁਣ ਦੱਸਣੀ ਹੈ ਵੀ ਇਹ ਚੱਕਰ ਵੀ ਤਾਂ ਨਿਕਲਣਾ ਕਰਿਆ ਚੱਕਰ ਵੀ ਚ ਵਧਦਾ ਗਿਆ ਹੈ ਸਰੀਰ ਚ ਨਿਕਲਣਾ ਚਾਹੀਦਾ ਉਹ ਉਹਦੇ ਨਾਲ ਜੋੜੀ ਹੋਈ ਹੈ ਇਹ ਕਥਾ ਸੁਣੀ ਉਹਨੇ পার্বਤੀ ਨੂੰ ਉਹ ਸੌ ਗਈ ਫਿਰ ਤੋਤਾ ਉੱਡ ਗਿਆ ਚਲੋ ਤੋਤੇ ਵਾਲੀ ਕਹਾਣੀ ਛੱਡੋ ਉਹ ਹੁਣ ਉਹੀ ਜਾਗੜੀ ਆ ਉਹੀ ਕਥਾ ਹੁਣ ਫੇਰ ਸ਼ੁਰੂ ਹੋਈ ਹੋਈ ਹੈ ਇਹ ਕਥਾ ਜਾਗੂਗਾ ਜਾਗਣਾ ਜਾਗਣੇ ਦਾ ਹਰ ਕੀਰਤਨ ਵਿੱਚ ਜਾਗਣਾ ਹਰ ਕੀਰਤਨ ਦੇ ਵਿੱਚ ਔਰ ਆਦਮੋ ਜਗਰਾਤੇ ਜਾਂ ਕਿਹੜੀ ਗੱਲ ਨਾਲੀ ਉਹ ਜਾਗੜਾ ਨਹੀਂ ਆ ਜਿਹੜੇ ਜਗਰਾਤੇ ਕਰਦੇ ਨੇ ਚੱਕਣਾ ਨਹੀਂ ਇਹ ਆਲਾਣ ਸੁਭਾਈ ਕਹੋ ਜਾਗਣਾ ਨਹੀਂ ਹੈ ਤਾਂ ਛੰਤੀ ਦੀ ਉਹ ਗੱਲ ਜਾਗਣਾ ਪਰ ਬਵੇਕ ਬੂਤੀ ਦੀ ਗੱਲ ਹੋਵੇ ਉਹ ਜਾਗਣਾ ਉਹ ਜਾਗਣਾ ਉਹ ਗੱਲ ਉਹੀ ਕਰਦੇ ਸੀ ਉਹੀ ਸੀ ਜਾਗਣ ਵਾਲੀਓ ਪਰ ਗੱਲ ਹੋਰ ਬਣਾਂਦੀ ਉਦੋਂ ਜੇ ਜਾਗਣਾ ਜਾਗਣ ਦੀ ਸਰ ساری ਰਾਤ ਸੌਣਾ ਕੋਈ ਗੱਲ ਸੁਣਾਉਂ ਜਿਹਦੇ ਨੇ ਜਾਗੇ ਬੋਲ ਸੋ ਇਹ ਬੁੱਧੀ ਜਾਗੇ ਉਸ ਉਹ ਤੇ ਵੀ ਸੋਹਣਾ ਉਹ ਵੀ ਉੱਠ ਕੇ ਹੋਰੇ ਕਲਪਣਾ ਤੋ ਪ੍ਰਭੂ ਕਹੇ ਸਿਮਰਨ ਜਪ ਤੱਕ ਪੂਜਾ ਪ੍ਰਭ ਦੇ ਸੁਣਨ ਤੋਂ ਪਹਿਲਾਂ ਜਪ ਤੱਕ ਪੂਜਾ ਦਾ ਪਤਾ ਹੀ ਨਹੀਂ ਲੱਗ ਸਕਦਾ ਜਿਹੜਾ ਜਾਪੈ ਤਾਂ ਪੂਜਾ ਇਹ ਸੁਣਨ ਤੋਂ ਬਾਅਦ ਦੀ ਗੱਲ ਹੈ ਸਮੁੰਦਰ ਵਿਚੇ ਜਬਤਾ ਪੂਜਾ ਹੋ ਗਿਆ ਜਬਤਾ ਪਤਾ ਪਹਿਲਾ ਕੀਤਾ ਸਮੁੰਦਰ ਬਾਅਦ ਚ ਹੋਇਆ ਹੋਇਆ ਹੁਣ 10ਵੀਂ ਪੜ੍ਹ ਕੇ ਕਾਲਜ ਵੀ ਇਹ ਕੀਤੀ ਹੈ ਵੀਏ ਦੇ ਬਾਅਦ ਫਿਰ ਸਕੂਲ ਦਾ ਜੇ ਵੀ ਦਾਖਲ ਹੋਊਗਾ ਫਿਰ ਉਹ ਤਾਂ ਕੱਲਿਆ ਸਮੁੰਦਰ ਵਿਚੇ ਜਬਤਾ ਪੂਜਾ ਜਬਤਾ ਪੂਜਾ ਵੀ ਕਰਦੇ ਹੁਣ ਤੇ ਕਹਿੰਦੇ ਸਮੁੰਦਰ ਵਾਲਿਆਂ ਨੂੰ ਜਬਤਾ ਪੂਜਾ ਦੀ ਲੋੜ ਨਹੀਂ ਹੁੰਦੀ ਪ੍ਰੈਮ ਦੇ ਸਕੂਲ ਛੱਡਿਆ ਰੋਜ਼ ਪਹਾੜੇ ਜਿਹੜੇ ਉਹ ਪ੍ਰੈਮ ਦੇ ਰੋਜ਼ ਪਹਾੜੇ ਫੜਦੇ ਸੀ ਨਾ ਤੇ ਅੱਜ ਕੱਲ ਉਹ ਫੇਰ ਨਹੀਂ ਫੜਦੇ ਉਸ ਤੇ ਯਾਦ ਹੋ ਜਾਂਦਾ ਮੈਨੂੰ ਇੱਕ ਵਾਰ ਜਿਹੜੀ ਜੀ ਇੱਕ ਵਾਰ ਜਪ ਲਈ ਦੁਹਰਾ ਨਹੀਂ ਜਪੀਤੀ ਹੁੰਦੀ ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ ਇੱਕ ਵਾਰ ਜਪ ਲਿਆ ਗੁਰਮੁਖ ਦਾ ਨਾਮ ਫੇਰ ਕਾਂ ਸਿਮਰਨ ਹੋ ਗਿਆ ਜਪਣ ਤੋਂ ਬਾਅਦ ਸਿਮਰਨ ਦੀ ਗੱਲ ਚੱਲ ਪਈ ਸਿਮਰਨ ਆਲੇ ਨਹੀਂ ਜਪਦੇ ਹੁੰਦੇ ਉੱਚੀ ਕਲਾਸ ਆ ਲੈ ਥੱਲੇ ਦੀ ਕਲਾਸ ਚ ਦੀ ਪਰਦੇਸ ਦੇ ਕਿਤਾਬਾਂ ਪੜ ਲਈਆਂ ਜਿਹੜੀਆਂ ਉਹ ਦੁਬਾਰਾ ਨਹੀਂ ਪੜੀਆਂ ਇਹਦਾ ਮਤਲਬ ਆ ਮਾਹੂਲਾ ਬੇਚੀ ਸਦਾ ਸੰਭੂਦੀ ਹੈਗਾ ਤੁਹਾਡਾ ਹੋਊਗਾ ਥੱਲੇ ਦੀ ਕਲਾਸਾਂ ਲੈਣੇ ਕੰਬਲ ਨੇ ਲੰਦੋਰ ਪਕਾਉਣ ਦੀ ਸੇਵਾ ਕਰਦੀ ਹੈ ਸਾਰੇ ਥੱਲੇ ਦੀ ਕਲਾਸਾਂ ਲੈਣੇ ਕੰਬਲ ਇਹ ਜਪਤਾ ਪੂਜਾ ਨਾਲ ਜਿਹੜੀ ਇਹ ਥੱਲੇ ਦੀਆਂ ਕਲਾਸਾਂ ਨੇ ਪ੍ਰਭ ਦਾ ਸਭ ਨੇ ਜਪਤਾ ਪੂਜਾ ਹਾਂ ਪ੍ਰਭ ਕਾ ਸਰੂਪ ਪ੍ਰਾਪਤ ਕੇ ਸਮੰਦੇ ਵਿੱਚ ਵੀ ਗਿਆਨ ਗਾਂਵਦੀ ਜਾਂਦਾ अपने आप ਜਦੋਂ ਖੱਚ ਦੇਖੋ ਇੱਕ ਵਾਰ ਤਾਂ ਅਸੀਂ ਕਥਾ ਕਰਦੇ ਕੁਝ ਪੈਸਾ ਕਥਾ ਦਿੱਤਾ ਜਦ ਜਪੜਾਂ ਜਾਂ ਕਥਾ ਕਰਦੇ ਅਸੀਂ ਜਾ ਪ੍ਰਾਪਤ ਕਰਦੇ ਜਿੰਨਾ ਜਰ ਮਨ ਪ੍ਰਬੋਧ ਦੇ ਨਹੀਂ ਉਹਨਾਂ ਜਰ ਕਿਸੇ ਨੂੰ ਲਿਜਾਣ ਦੀ ਗੱਲ ਨਹੀਂ ਇਦਾਂ ਲੋਕ ਹਾਜ਼ਰ ਹੀ ਜੋੜ ਰਹੇ ਨਾ ਇਕੱਠਾ ਕਰ ਰਹੇ ਪਰ ਜਦ ਖਰਚਣ ਲੱਗਦੇ ਨੇ ਜਦੋਂ ਆਪੀ ਵੱਡੀ ਜਾਂਦਾ ਹੈ ਤੇ ਜਦ ਤੱਕ ਪੂਜਾ ਤੇ ਬਿਨਾ ਬੱਤਾ ਸਭ ਜਗਾ ਲਿਖੀ ਹੈ ਪਤਾ ਨਾ ਫਿਰ ਵੀ ਹੈ ਉਹ ਫਿਰ ਜਦ ਤਾ ਬਦਾਨੀ ਵੱਧਾ ਫਿਰ ਦਿੱਤੇ ਦੇ ਬਾਅਦ ਕੈਸੇ ਬੱਤਾ ਹੈ ਪਹਿਲਾਂ ਜਦ ਤਾ ਬਣਾ ਵੱਧਿਆ ਫਿਰ ਜਦ ਤਾ ਬਤੇ ਬਿਨਾ ਸਿਮਨਾਰ ਪਰ ਐਸੇ ਹੀ ਵੱਧਦਾ ਹੈ ਪਤਾ ਜੀ ਹੋ ਜਾਂਦਾ ਹੁੰਦਾ ਕੱਲ ਇਹ ਐ ਸਭ ਜੇ ਅਸੀਂ ਇਹ ਵੀ ਕਹਿ ਦਈਏ ਜਦੋਂ ਤਾਂ ਪੂਜਾ ਵਿੱਚ ਆਉਂਦੀ ਫਿਰ ਵੀ ਸਭ ਪੂਰੀ ਕਲੀਅਰ ਨਹੀਂ ਹੁੰਦੀ ਸੱਜਣ ਜੀ ਪੂਰੀ ਕਲੀਅਰ ਨਹੀਂ ਹੁੰਦੀ ਗੱਲ ਇਹ ਤਾਂ ਕੋਈ ਕਿੰਨਾ ਪੂਜਾ ਨਾਲ ਘੱਟਿਆ ਕੁਛ ਰੋਟਣਾ ਆ ਬਸ ਘੱਟਿਆ ਟੋੜਨਾ ਆਵੇ ਤਾਂ ਉਹ ਜੈਲੇ ਟੋੜਨਾ ਆਵੇ ਖੱਟੀ ਹੈ ਲੰਬੜ ਜੱਲੇ ਕੋਈ ਸ਼ਬਦ ਟੋੜਨਾ ਆਵੇ ਖੱਟੀ ਹੈ ਟੋੜਨੀ ਆਉਂਦੀ ਸਭ ਖੱਟੀ ਹੈ ਉੱਥੇ ਉੱਥੇ ਲੰਬੜ ਦੇ ਵਿੱਚ ਖੱਟੀ ਹੈ ਉੱਥੇ ਜੱਬ ਤੱਕ ਦੇ ਵਿੱਚ ਪੂਜਾ ਚ ਖੱਟੀ ਸੀ ਕਲਾਸ ਅੱਗੇ ਚਲੀ ਗਈ ਆਪ ਜੇ ਬਾਰੇ ਦੀ ਗੱਲ ਹੋ ਰਹਾ ਅਵਰਾ ਨਾਮ ਦੇ ਬਾਬਾ ਬਾਰੇ ਦੀ ਗੱਲ ਜਿਹੜਾ ਅਵਰਾ ਨਾਮ ਦੇ ਬਾਬਾ ਤੇ ਜਪਤਾ ਪੂਜਾ ਦੀ ਲੋੜ ਨਹੀਂ ਹੁੰਦੀ ਕਹਿੰਦਾ ਮਤਲਬ ਹੈ ਜਪਤਾ ਪੂਜਾ ਦੀ ਲੋੜ ਜਦੋਂ ਆਲੇ ਪਹਿਲੀ ਪੂਰਨ ਲੋੜ ਹੋਵੇ ਜਿਹਨੂੰ ਚੁਪਾ ਰਹੇ ਹਨ ਉਹਨੂੰ ਲੋੜ ਹੁੰਦੀ ਹੈ ਜਦ ਆਪ ਜਪਉਣ ਲੱਗਿਆ ਤਾਂ ਫੇਰ ਹੀ ਲੋੜ ਸੀ ਜੋ ਕੋਰਸ ਕਰ ਲਿਆ ਉਹਨਾਂ ਨੇ ਪ੍ਰਭ ਕਹੇ ਸਿਮਰਨ ਨੂੰ ਦਿਨ ਦੂਜਾ ਪਰ ਉਹਦੇ ਜਿਵੇਂ ਨਾ ਦੂਜਾ ਹੀ ਦੂਜਾ ਬਾਹਲਾ ਸ਼ਰੀਰ ਹੁੰਦਾ ਹੀ ਦੂਜਾ ਦੂਜਾ ਸਾਡਾ ਬਾਹਲਾ ਸ਼ਰੀਰ ਰਣਜਨ ਇਹ ਦੋ ਇਹ ਪਛਾਲੇ ਅਲੱਗਾ ਪੈਦਾ ਕਰਦਾ ਜੇ ਕੱਲੀ ਜੋਤ ਹੈ ਫਿਰ ਤਾਂ ਸਾਰਿਆਂ ਦੇ ਕੋਈ ਜੋਤ ਹੈ ਫਿਰ ਦੂਜਾ ਹੀ ਕੋਈ ਜਿੰਨਾ ਜਰ ਬਾਹਲਾ ਸ਼ਰੀਰ ਹੈ ਸਾਡਾ ਜੀ ਦੋ ਬੰਦੇ ਆ ਸੀ ਉਹਨਾਂ 'ਚ ਦੂਆ ਹੈਗਾ ਜੇ ਮਨੁੱਖੀ ਕਸਨ ਉਜਮੰਦੂ ਵੀ ਕਹਿੰਦਾ ਸਰ ਜੀ ਵਾਣੋਂ ਆਪਣਾ ਜਿਹੜਾ ਜਨਰਲ ਬਾਹਰ ਸਪੀਡ ਹੈ ਜਿਹੜਾ ਵਾਣ ਦੂਸਰੀ ਹਾਂ ਉਹ ਬੰਦ ਕਰ ਆਪਣੇ ਸਫਰ ਨਾਲ ਜਿਹੜਾ ਭਾਵੇਂ ਪੜ ਗਿਆ ਅੰਦਰ ਦੂਜਾ ਦੂਜਾ ਵੀ ਰਹਿ ਤੇ ਵਾਲਾ ਫੇਮ ਦੀ ਹੈ ਕਿਉਂਕਿ ਪਹਿਲੀ ਸਟੇਜ ਤੇ ਸੀ ਪਹਾਲਾ 6 ਕਹਾਂ ਜਾ ਕੇ ਉਹ ਜਿਹੜਾ ਅਸਰ ਜਰਾ ਕਰਾਂਗਾ ਨਾ ਕਰਾਂਗਾ ਕਿ ਮਨ ਕਰਾ ਦਿੰਦੇ ਗਾਉਂ ਜਾ ਕੇ ਫਿਰ ਦਰਾਖਰੀਅਤ ਚਾ ਲਾਂਗੇ ਪੈਰਾਂ ਸੀੇ ਛੋਟ ਚੱਲਾਂਗੇ ਕੋਈ ਛਡੌਣੇ ਨਾ ਚਾਹੀਏ ਪ੍ਰਭ ਕੇ ਸਿਮਰਨ ਤੀਰ ਤੇ ਜਮਾਨੀ ਪ੍ਰਭ ਕੇ ਸਿਮਰਨ ਦਰਗਹੇ ਮਾਨੀ ਪਹਿਲੇ ਸਟੇਜ ਵਿੱਚ ਛੀਤਾ ਮੋੜ ਡੁੱਟਦਾ ਦੂਜੇ ਸਟੇਜ ਵਿੱਚ ਬਿਲਕੁਲ ਖਤਮ ਹੋ ਜਾਂਦਾ ਦੂਜੇ ਆ ਕੇ ਉਹਨੇ ਖਤਮ ਹੋ ਗਿਆ ਪ੍ਰਭੂ ਕਾ ਸਮਰਨ ਪੀਰ ਤੇ ਇਸਮਾਨੀ ਪ੍ਰਭ ਕਾ ਸਮਰਨ ਤੇ ਇਸਮਾਨੀ ਆ ਜਿਹੜਾ ਪ੍ਰਭ ਕਾ ਸਮਰਨ ਸਮਰਨ 18 ਤੇ ਇਸਮਾਨੀ ਮੈਨੂੰ ਜਾਨੀ ਕੀ ਹੈ ਉਹ ਇੰਤਕਾ ਲੜ ਦੇ ਇਸਪੜੀ ਕਵਾਂ ਮੜ ਮੜਾਇ ਉਹ ਤਾਂ ਚਿਪੜੀ ਉਹਨਾਂ ਜਾਣ ਹਦਾ ਇਹ ਜਿਹੜਾ ਲੰਬਾ ਦਰਿਆ ਆਕਾਸ਼ ਨੇ ਲੰਬਾ ਦਰਿਆ ਉਹ ਸੁਸਲ ਕਰਦਾ ਬੂਧ ਉਹ ਉਸ ਦੇ ਵਿੱਚ ਜਿਹੜਾ ਦਰਿਆ ਵਗਦਾ ਹੈ ਉਹ ਜਿਹੜਾ ਵਿਚਾਰਤਾ ਹਦਾ ਕਾਢੀ ਪੀਰ ਸੁਣਾਉਣੇ ਨੇ ਕਾਢੀ ਪੀਰ ਸੁਣਾਉਣੇ ਉਹ ਪ੍ਰਭ ਤੇ ਸਮਰਦਾ ਨਾਲ ਉਦਰੇ ਜਿਹੜੀ ਆਪੇ ਹੀ ਦੂਰ ਹੋ ਗਈ ਆਪੇ ਹੀ ਭੱਜ ਜਿਹੜੇ ਦਰੋਂ ਆਪੇ ਹੀ ਦੂਰ ਹੋ ਗਏ ਭਾਵੇਂ ਜੀ ਦੀ ਬਾੜਾ ਰੋਜੋ ਆਬਦ ਨਹੀਂ ਜਾਂਦੀ ਜੋ ਜੋ ਵਿਚਾਰ ਕਹਾ ਤੇ ਕਹਾ ਵੱਧਾ ਜਾਂਦਾ ਉਹ ਜਿਹੜੇ ਛੁਟਕੇ ਨੇ ਆਵੇ ਦੂਰ ਹੋ ਗਏ ਉਹ ਅੰਗੇ ਪਦੇ ਸਭ ਤੋਂ ਉੱਪਰ ਦੇ ਬੰਦੇ ਸਭ ਤੋਂ ਉੱਪਰ ਦੇ ਬੰਦੇ ਸਭ ਤੋਂ ਉੱਪਰ ਉਹ ਆਵੇ ਲਿਈ ਹਾਂ ਪਰ ਉਹ ਕੇ ਸ਼ਿਨਦਰਨ ਦਰਗਾਹ ਮੰਨੀ ਹਾਂ ਪਰ ਉਹ ਸਿਮ ਦੱਡਾ ਮੰਨੀ ਪਰ ਉਹ ਸਭ ਕੁਝ ਕੁਛ ਕੀਤਾ ਹਿਆ ਕਰ ਰੁਦਾ ਕਰ ਰੁਦਾ ਚ ਬਰਸਦਾ ਸੀ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਮਤਲਬ ਹੈ ਜੋ ਜਦੋਂ ਤਾਂ ਪਰ ਉਹ ਸਭ ਜੋ ਵੀ ਕੁਛ ਕਰਦੇ ਸੀ ਇਹਾਂ ਦੀ ਬਰਕਾ ਚ ਬੋਲਦਾ ਪ੍ਰੋਫੈਸਰ ਨੇ ਮੈਂ ਅੰਦੀ ਪਾਛਾ ਦਰਦਾ ਪ੍ਰੋਫੈਸਰ ਅਸਲ ਤੇ ਦਰਦਾ ਜੋ ਯੋਗਿਆ ਬਾਣੀ ਬਾੜੀ ਉਥੇ ਦੀ ਹੈ ਉਹਨਾਂ ਨੇ ਆਪਦਾ ਕੁਝ ਕਿਹਾ ਸਰਗਾ ਜ ਮੰਨੀ ਜਾਂਦੀ ਹੈ ਇਹ ਗੱਲ ਇਹਨਾਂ ਦੀ ਕਹੀ ਪਰਬਕਾ ਸਮਰਨ ਹੋਏ ਸੁਪਲਾ ਪ੍ਰਾਪਤ ਸਮੰਤ ਦੇ ਵਿੱਚ ਇੱਕ ਇਹ ਗੱਲ ਹੈ કે જો કુછ ભી હો રહા હે સંસાર વો પરાલકણા ચાહીદા સે સાડે हो બલતે हो હો રહયા ભલાઈ હે બુરા ભી હે જેતા એ મન ધારો જેતા સબ પ્રકશન હો રહયા હે જે કતે કતે ઇથે લગદા કે સમાનતા وچ ચૂક ਜੇ ਤੁਸੀਂ ਬੁਰਾ ਲੱਗਦਾ ਜੋ ਵਾਪਰ ਰਿਹਾ ਹੈ ਬੁਰਾ ਲੱਗਦਾ ਤੁਹਾਡੇ ਇਹ ਤੁਸੀਂ ਸਰਵੰਸ ਦੀ ਆਪ ਦੇਖੋ ਇਹ ਟੈਸਟ ਤੁਹਾਡੀ ਹੈ ਇਹ ਕਿਸੇ ਆਦਮੀ ਜੀ ਨਹੀਂ ਆਉਂਦੀ ਉਹ ਪਹਿਲਾਂ ਫੈਸਲਾ ਕੇ ਦੇਖ ਲਓ ਤੇਦੇ ਝਟਕਾ ਖਾਜੋ ਜੇ ਕਿਤੇ ਇਹ ਤੁਹਾਡਾ ਆਤਮ ਵਿਸ਼ਲੇਸ਼ਣ ਵੀ کہہ ਸਕਦੇ ਆਂ ਤੁਹਾਡੀ ਹਾਂ ਆਪ ਕੋ ਇਹ ਜਮ ਹੁੰਦਾ ਹੈ ਇਹ ਜਾਣੀ ਕਿਸਮ ਦੀ ਤੁਹਾਨੂੰ ਇਹ ਕਹਿ ਲਓ ਬਈ ਇੱਕ ਇਨਸਪੈਕਸ਼ਨ ਕਰਨੇ ਹਾਂ ਹਾਂ ਹਾਂ ਕੋਈ ਇਨਸਪੈਕਸ਼ਨ ਹਾਂ ਚੈੱਕ ਕਰ ਆਪਣਾ ਆਪ ਚੈੱਕ ਕਰ ਚੈੱਕ ਆਤਮ ਆਤਮ ਪਰਚੋ ਇਹ ਹੋਏ ਹਾਂਜੀ ਪ੍ਰਭ ਕੇ ਸਿਮਰਨ ਹੋਏ ਸੁਭਲਾ ਕੇ ਸਿਮਰਨ ਸਫਲ ਫਲਾ ਸੁਭਲ ਫਲਾ ਰੰਗ ਕੇ ਸਮਰ ਸੋਫਲ ਕਲਾ ਫਿਰ ਜਿਹੜੇ ਸੇ ਫੜ ਲੱਗਦੇ ਨੇ ਸੇ ਸਨ ਸਰੇ ਤੇ ਫਿਰ ਸrets ਗਿਆਨ ਦੇ ਫੜ ਲੱਗਦੇ ਨੇ ਨਾਮਕ ਜਿਹੜਾ ਹੈ ਗੁਰ ਸੰਤੋਖ ਰੂਪ ਧਰਮਕ ਗੁਰ ਸੰਤੋਖੋ ਸੰਤੋਖ ਰੁਖ ਧਰਮ ਫੁੱਲ ਫਲ ਗਿਆ ਫਿਰ ਗਿਆਨ ਦਾ ਫੜ ਲੱਗਦਾ ਸੌਣ ਕਿਤੇ ਜਾ ਕੇ ਫਿਰ ਸ੍ਰੇਸ਼ ਗਿਆਨ ਦਾ ਫੜ ਲਓ ਸਰ ਫਿਰ ਜਾ ਕੇ ਦਾ ਫੜ ਲਓ ਜੇ ਇਹ ਮੰਨੇ ਪ੍ਰਭ ਕੇ ਸਿਮਨ ਹੋਏ ਜੋ ਪੜਾ ਲਓ ਜੇ ਵੀ ਜੇ ਪੜਨੇ ਜੋ ਕਿ ਕਿਸੇ ਕਿਸੇ ਪਰਲੇ ਨੂੰ ਗੋਲ ਫਿਰ ਆ ਵੀ ਦਾਲਾ ਬੈਠਾ ਤਾਂ ਜੋ ਹੋ ਰਿਹਾ ਠੀਕ ਆ ਪੈ ਹੋ ਜੂ। ਵੀ ਦੇਖੋ ਦੇ ਕੀ ਬੰਦਾ। ਹੋਣਾ ਤਾਂ ਪਈ ਐ ਹੈ ਤਾਂ ਵੀਰ ਜੀ। ਹੋਣਾ ਆਪਣੇ ਘਰ ਤੋਂ ਕੁਝ ਵੀ ਲੋਗੋ। ਜੇ ਉਹ ਕੋਈ ਜੋਗ ਰੇਲ ਨੂੰ ਟੱਕਾ ਲਾਈ ਜਾਵੇ ਰੇਲ ਪਹਿਲਾਂ ਹੀ ਹੋੜੇ ਹੋੜੀ ਚੱਲਦੀ ਹੋਵੇ। ਉਹਦੇ ਟੱਕਾ ਲਾਇਦੇ ਢੋਲ ਤੇ ਲੋਗੀਓ। ਉਦੋਂ ਤੱਕ ਆਉਣਾ ਨਾ ਉਹ ਮੱਠੀ ਹੋਵੇ ਨਾ ਤੇ ਇੱਕ ਤੇ ਲੋਗੇ ਉਹਨਾਂ ਨੇ ਉਹ ਤਾਂ ਫਸਟ ਕਰ ਲਿਆ ਹਾਂ ਸੇਸ਼ 임ਰੇ ਜਿਨ ਆਪ ਸਿਮਰਾਈ ਸੇ ਸਿਮਰੇ ਸਿਮਰਦਾ ਕੋਣ ਜਿਨ ਆਪ ਜਨਾਬ ਸੇਰਾ ਤੋਂ ਦੇ ਇਸ ਅਵਸਥਾ ਦੇ ਵਿੱਚ ਜਹਾਂ ਆਪ ਵੀ ਰਖਦਾ ਹੈ ਤੇ ਉਹਨੇ ਕਹੁੰਲਾ ਨਾ ਜੇ ਕੋ ਪਹਿਲਵਾਨ ਹੋਵੇ ਆਪਣੇ ਏਰੀਆ ਦਾ ਪਿੰਡ ਦਾ ਐਕਟਿਵ ਉੱਧੀ ਹੈ ਬਲਕ ਬਿਲ ਜਿਹੜੇ ਬਲਕ ਦੀ ਟੀਮ ਬਲਕੀ ਉਹ ਧਿਆਨ ਦੇ। ਆ ਗਿਆ? ਵਿਜੇਪੁਰ ਦੀ ਹੈ। ਉਹ ਇਹਨਾਂ ਪਰਮੈਸ਼ਨ ਨੂੰ ਸਬਤ ਕਰਨਾ ਦੁਨੀਆ ਕਹਿੰਦੀ ਪਰਮੈਸ਼ਨ ਹੈ ਦੀ ਉਹ ਲਾਈ ਲੱਗੀ ਹੈ। ਧਿਆਨ ਪਰਮੈਸ਼ਨ ਨਹੀਂ ਲਵਦਾ ਸਰ। ਉਹ ਫਿਰ ਉਹਦੇ ਤੇ ਕਿਰਪਾ ਵੀ ਰੱਖਦਾ ਕਦੇਰੀ। ਜੇ ਬਸ ਥੋੜੀ ਕਿਸੇ ਤੇ ਹੈ ਨਹੀਂ ਥੋੜੀ ਸਾਰਿਆਂ ਤੇ ਹੀ ਹੈ ਉਹ ਤਾਂ ਥੋੜੀ ਕਨੇਰੀ ਦਾ ਸਪੈਸ਼ਲ ਐਕਸਟਰਾordinary ਐਕਸਟਰਾordinary ਇਹ ਆਪਣਾ ਬੰਦਾ ਆ ਜਾ ਤੇਰਾ ਬੰਦਾ ਉਹ ਕਹਿੰਦਾ ਨਾ ਕਿ ਸਭ ਕੁਝ ਮੈਨੂੰ ਝੋਪਿਆ ਜਦ ਤੇਰਾ ਤੇਰਾ ਬੰਦਾ ਤੇ ਆਪਣਾ ਮੰਨ ਲਿਆ ਪਰ ਉੱਚਾ ਕਰ ਲਿਆ ਉੱਚਾ ਵੀ ਆਪਣਾ ਤਾਂ ਉਹਦੇ ਤੋਂ ਉੱਚਾ ਮੰਨ ਲਿਆ ਕਨਵੀਟੈਂਸ ਵਿੱਚ ਲੈਣਾ ਜਿਹੜਾ ਇਹ ਓਖਾ ਜਰੂਰੀ ਦੇ ਵਿੱਚ ਲੈਣਾ ਓਖਾ ਕਨਵੀਟੈਂਸ ਵਿੱਚ ਜਦ ਆਜੰਤ ਜੇ ਕੁਝ ਸਾਮਿਆ ਹੋ ਜੇ ਰੇਤਾ ਲੌਚਾ ਪੀ ਲਓ ਸਾਰੇ ਜਿਵੇਂ ਬਾਰੇ ਸੇ ਸਿਮਰੇ ਜਿਨ ਆਪ ਸਿਮਰਾਏ ਨਾਨਕਤਾ ਅਗੇ ਲਾਗੂ ਪਾਏ ਬੇਬੀ ਉਹਨਾਂ ਸਿਖਲਡ ਕਰਦੇ ਨੇ ਉਹਨਾਂ ਦੇ ਤਹਿਲੀ ਮਤਲਬ ਪਰ ਜਿਨ੍ਹਾਂ ਨੇ ਸਮਰੇਆਵਾਂ ਨਾਲ ਵਿਚ ਸਿਖੇ ਉਹ ਪਾਣੀ ਨਾਲ ਜੁੜੇ ਹੋਏ ਸਨ ਪਾਣੀ ਨਾਲ ਹੈ ਸਿਰਨਾ ਪਾਣੀ ਨਾਲ ਕੰਮ ਨੇ ਜਪ ਕੇ ਬਾਹਰੋਂ ਸਿੱਖੇ ਜਪਣ ਵਾਲੇ ਆਤਮਾ ਤੋਂ ਆਏ ਨੇ ਅੱਗ ਉਹ ਆਪਣੀ ਲੱਕੜ ਆ ਗੱਜਣੀ ਆ ਇੱਕ ਤਾਂ ਉਹ ਲੱਕੜ ਜੜੀ ਹੈ ਹੁਣ ਆਪ ਉਹ ਜੋ ਸੁਧਰ ਉਪਰ ਗਟੋਈ ਜੋ ਜੱਪ ਦੇ ਵਿੱਚ ਅਸੀਂ ਬਾਹਰੋਂ ਟੱਕੇ ਰੁਪੇ ਲਿਆ ਕੇ ਰੱਖ ਕੇ ਉਹ ਜਿਹੜਾ ਜਾਨਵਰ ਉਹਨੇ ਉਹ ਜਾੜ ਕੇ ਉਹਦੇ ਤੋਂ ਆਪ ਮੁਕਟੜ ਪੈਦਾ ਕਰਨ ਵਾਸਤੇ ਜੱਪ ਤਾਂ ਉਹ ਤੱਕ ਪਹੁੰਚ ਕੇ ਜਿੱਥੇ ਹੈ ਉਹਨਾਂ ਦਾ ਮਸਰਕਾ ਦੋ ਜਿਹੇ ਖਜਾਨੇ ਖਜਾਨੇ ਤੱਕ ਪਹੁੰਚਣ ਵਾਸਤੇ ਬਾਹਲੇ ਜਾਂਦੀ ਲੋੜ ਹੈ। ਜਦ ਉਹ ਖੁੱਲ ਗਿਆ ਛੱਣ ਉਹਦਾ ਫਿਰ ਤਬਦੀਲ ਉਹ ਜ਼ਬਰਦਸਤ। ਤਾਹੀਆਂ ਜ਼ਬਰੋ ਸਨ ਜ਼ਬਰ ਸੁਖਾਵਾ ਰੂਪ।